ਜੈ ਮਾਰਗ ਕੇ ਗਨੇ ਜਾਇ ਨਾ ਕੋਸਾ ਜਿਹੜੇ ਰਸਤੇ ਜਪਾ ਕੋ ਨਹੀਂ ਗਿਣ ਸਕਦੇ ਉਹਦੇ ਉੱਤੇ ਨਹੀਂ ਕੋ ਗਣੂ ਲੋਟੇ ਕਿਲਾ ਕਿਲੋਮੀਟਰ ਲੱਗੇ ਕਹਿੰਦੇ ਜਾਇ ਨਾ ਕੋਸਾ ਮਤਲਬ ਉਹ ਰਸਤਾ ਉਖੜ ਵਾਲਾ ਜਿਹੜਾ ਕਹਿੰਦੀ ਹੈ ਹਰ ਨਾਮ ਉਹ ਸੰਗ ਤੇਰੇ ਨਾਲ ਖਜਦ ਜਿਹੜਾ ਲੰਬਾ ਰਸਤਾ ਹੋਵੇ ਲੰਬਾ ਖੱਜੀ ਜਾਈਦਾ ਉਹ ਉਹਨੇ ਕੋਸ਼ਿਸ਼ ਦੀ ਜਿਹਨੇ ਨਾ ਤਾਂ ਲਖਜਾਨਾ ਵੀ ਤੇਰੇ ਕੋ। ਬੜਾ ਸਸਾ ਵੱਡਾ ਲੱਗਦੇ ਤੋਸ਼। ਤੇ ਉਸੇ ਨਾਲ ਸਸਾ ਵੱਡਾ ਹਾਂ ਤੋਸ਼ਾ ਲਫ਼ਜ਼ਨ ਇੱਕ ਪੰਜਾਬੀ ਦਾ ਦੀ ਹੈਗਾ। ਪਹਿਲਾ ਬ੍ਰੋਗਦੀ ਦੀ ਬਜਾਤ ਜਾਂ ਫਾਰਸੀ ਫਾਰਸੀ ਦਾ ਲੱਗਦਾ ਤੋਸ਼। ਖਜਾਨਾ। ਇਹ ਲੋਗ ਉਹ ਜੀਸ ਨੇ ਖਿਆਨਤ ਤੋਂ ਛੱਡਦੇ ਸੀ ਜੀ ਜੋ ਕੋਈ ਨਹੀਂ ਲੱਗਦਾ 100 ਲੱਗ ਜਾ 100 ਲੱਗ ਜਾ ਵੀ ਉੱਧਰ ਮੈਨੂੰ ਲੱਗ ਜਾ 100 ਲੱਗ ਜਾ 100 ਆਪਣਾ 100 ਆਪਣਾ ਲੱਗਦਾ ਉਹਨਾਂ ਦਾ ਸ਼ੋਰ ਉਹਨਾਂ ਦਾ ਸ਼ੋਹਰ ਨਹੀਂ ਉਹਨਾਂ ਦਾ ਸ਼ੋਰ ਸ਼ੋਰ ਹੈ ਇਹਨਾਂ ਸ਼ਾਹ ਵਿੱਚ ਪਤਾ ਕੀ ਹੈ ਇਹ ਆਏ ਨੇ ਪਾਕਿਸਤਾਨ ਤੋਂ ਬਿਸ਼ਲੀ ਗਲੇ ਇਹਨਾਂ ਇਹਨਾਂ ਦੇ ਪ੍ਰਭਾਵ ਉਹਦਾ ਉਪਾਜਾ ਸਿਰੋਹੀ ਪਾਜਾ ਸਾਡਾ ਲੋਕ ਪਟਾਣਾ ਸਾਡਾ ਸਾਡਾ ਬਟਾ ਸਾਡਾ ਪ੍ਰਭਾਵ ਸੀ ਉਰਦੂ ਭਾਸ਼ਾ ਦਾ ਤਾਂ ਮਿਕਸ ਵੀ ਨਾ ਜਦੋਂ ਪਾਕਿਸਤਾਨ ਜੋ ਕਠਾਈ ਹੋ ਰਹੀ ਉਹਨਾਂ ਸਾਨੂੰ ਉਰਦੂ ਜਾਂਦੀ ਰਹੀ ਹੈ ਐਨ ਡਬਲ ਵਿੱਚ ਆ ਕੇ ਲੇ ਗਏ ਨਾ ਆਪ ਇਹ ਤੋਂ ਪੂਰ ਬੁੜੂ ਆਪਾਂ ਸਾਡੇ ਤੇ ਇਹ ਵੀ ਡਬਰਾ ਹੋ ਜਾਂਦਾ ਆਪਾਂ ਜਦੋਂ ਤਾਂ ਜੋਨੀ ਇੱਥੇ ਥੋੜਾ ਜਿਹਾ ਅੱਧੀ ਫਾਰਸੀ ਤਾਂ ਤਾਂ ਨਹੀਂ ਹੈ ਇੱਥੇ ਕਿੱਥੇ ਜਾ ਕੇ ਆਹੀ ਦੀ ਬਰਦਾਸ਼ਤ ਨਹੀਂ ਹੋ ਰਹੇ ਜੈ ਮਾਰਗ ਕੇ ਗਨੇ ਜਾਏ ਨਾ ਕੋ ਸਾਥ ਹਰ ਕਾ ਨਾਮ ਉਹ ਸੰਕੋਸ਼ਾ ਉਹ ਤੇ ਆਪ ਕਾ ਮੈਂ ਭਿਗਿਆ ਦੁਦ ਦੇ ਕੋਣ ਗਿਆ ਨਾ ਖਾਚਾ ਚਾਹੀਦਾ ਨਾ ਹਰ ਦਾ ਨਾਮ ਸੰਗ ਉਜਿਆਰਾ ਲਾਈਟ ਨਹੀਂ ਚਾਈਦੀ ਐ ਜਾਨੇ ਘਵਾਰਾ ਮੈਂ ਕਹਿੰਦੀ ਬਿਠਾ ਦਿਆਂ ਬੈਟਰੀ ਨਹੀਂ ਹੈ ਫਿਰ ਸਭ ਤੋਂ ਫਿਰ ਹੈ ਤਾਂ ਲਾਈਟ ਵਾਸਤੇ ਵਾਪਸ ਬੈਠੀ ਹੈ ਹੈ ਕੋਈ ਹੱਥ ਮਾਰ ਨਹੀਂ ਤਾਂ ਉੱਥੇ ਨਾਲ ਹੋ ਜਾ ਰਿਹਾ ਲਾਈਟ ਵੀ ਚਾਹੀਦੀ ਹੈ जय पंथ तेरा कौन ना श्यामू हर का नाम तय नाल पहचान जेडे रास्ते तेरा कोई जानू नहीं है पहचानू नहीं श्याम तेरा गुण है उसका नाम है उसका नाम कोई तेरी पहचान में बैठा आ जाओ पैदल थोड़ी दृष्टि जदे रेला दे ओ तेरा गुण है तेरा पहचान नाम है पहचानू ज्ञान ਇਹਦੇ ਪੰਡੇ ਦੀ ਗੱਲ ਆ ਰਹੀ ਹੈ ਜੇ ਪੰਡੇ ਜੇਹ ਪੰਡੇ ਉਹ ਕਿਹੜੇ ਪੰਡੇ ਬੋਲਦੇ ਆ ਗੱਲਾਂ ਜਿਹਦੀ ਮਦਾਬਾ ਦੇਨ ਜੀ ਕਿਸਾ ਨੂੰ ਕਰਕੇ ਦੇ ਜਾਂਦਾ 1000 ਮਹੱਲਤ ਇੱਥੇ ਐ ਤੇ ਉੱਥੇ ਦੋਈ ਗੱਲਾਂ ਹੈ ਪੰਡੇ ਦਾ ਮਤਲਬ ਰਸਤਾ ਬਰ ਦਖੋ ਜਦ ਜਾਇਨਾ ਕੋਸਰ ਜਾਂ ਪੱਜੰਦੀ ਜਾਣ ਗਿਆ ਕੋਸਰ ਦਿੱਕੇ ਨੇ ਕੋਲਾ ਜ਼ਬਰ ਕਰ ਦਿੱਤਾ ਕੀ ਲਾਇਕੀ ਅਸੀਂ ਹਾਂ ਉਹ ਨਹੀਂ ਦਿਖਾ ਅਗਰ ਆਪ ਕੋਸ਼ਾ ਸੀ ਹੋਵੇ ਬਸ ਐਸੇ ਨਾਲ ਦੂਸਰਾ ਨਹੀਂ ਆਉਂਦਾ ਠੀਕ ਹੈ ਇੱਥੇ ਵੀ ਉਹ ਤੇ ਡੋਲ ਜਾ ਵਾਲਾ ਤਾਂ ਇੱਥੇ ਲੋੜ ਹੈ ਦੂਸਰੇ ਦੀ ਗੱਲ ਤੋਂ ਦੀ ਲੋੜ ਹੈ ਜਿਆਦਾ ਇੱਥੇ ਆ ਜਿਆਦਾ ਬਹੁਤ ਇੱਥੇ ਹੈ ਜਰੂਰ ਕੋਈ ਤੇਰਾ ਨਾਮ ਮੇਰਾ ਦੌਜੂ ਦੀ ਗੁਰੂ ਘਰ ਉਹ ਨਾਮ ਦਾ ਹੈ ਛਾਤੀ ਯਾਨੀ ਇਹ ਕੋਸਾ ਕੀ ਕਿਹਾ ਜਿਦਾ ਤਾਂ ਪੜਨੇ ਦਾ ਤੈਨੂੰ ਪਤਾ ਹੀ ਨਹੀਂ ਦੀ ਜ਼ਿੰਦਗੀ ਦੇ ਕਿੱਦੇ ਸਾਹ ਹੋਣੇ ਨੇ ਕਿੰਨੇ ਨਹੀਂ ਆਉਣੇ ਉਹ ਤੇਰੇ ਕੋਲ ਇਹ ਤੋਤਾ ਹੀ ਹੈ ਲੋਕੀ ਗੱਲ ਕਰਦਾ ਇਹ ਪਤਾ ਕਿੰਨੀ ਲੰਮੀ ਜਤੀ ਹੈ ਕਿੰਨੇ ਕੋਸਰਨਾ ਕਿੰਨੇ ਕੋਸਰਨਾ ਪਤਾ ਕੋਈ ਹੈ ਇਹ ਦੋ ਮਾਇਗਾ ਕਹਿੰਦੇ ਬਸ ਸਿੱਧਾ ਆ ਗੱਲ ਅੱਲਾ ਨਾਲ ਕੋਈ ਹੋਰ ਵੀ ਨਹੀਂ ਬਹੁਤ ਕੁਝ ਹੋਟੀਆਂ ਹੋ ਰਹੀ ਨੇ ਉਹ ਫਿਰ ਕਈ ਵਾਰ ਸਾਡੇ ਮਸਲ ਦੀ ਗੱਲ ਦੀ ਜਾਂਦੀ ਜਿੰਦਗੀ ਦੇ ਪੰਨੇ ਦੀ ਗੱਲ ਹੈ ਅਜੇ ਜੀਵਨ ਦਾ ਹੈ ਹੀ ਪੈਂਦਾ ਪੈਂਦਾ ਪੈਂਦਾ ਪੈਂਦਾ ਪੈਂਦਾ ਬਾਰ ਬਾਰ ਐਸਾ ਜਿੰਦਗੀ ਦਾ ਹੋਣਾ ਨਜ਼ਾਰਾ ਕਾਨਾ ਘੜਾ ਪੈਂਦਾ ਨਾ ਕੋਈ ਜਿੰਦ ਦੇ ਕੋਸਰ ਨੇ ਇਹਦੇ ਕੋਈ ਦਾ ਨਾਮ ਹੈ ਸੰਤੋਸ ਸਰ ਇਹ ਮਹਾ ਭਿਆਨ ਤਬਤ ਕੋ ਕਾਮ ਤੇ ਹਰ ਕੋ ਨਾਮ ਕੀ ਤੁਮ ਉਪਰ ਸ਼ਾਵ ਚ ਕਿ ਜਿਆਦਾ ਤਬ ਤਤਰੋ ਕਾਮ ਬੇਤੀ ਹੋ ਕੇ ਕਿਥੇ ਉਤਸਤੀ ਉਹ ਸਪੈਦਨ ਕੇ ਨਾਮ ਕੀ ਝਾਮ ਰਹੂਗੀ ਹਜ਼ਾਰ ਤੋਂ ਬਦਾ ਦੇ ਰਿਹਾ ਨਾ ਨਾ ਨਾ ਸਭ ਸਭ ਖੈਟ ਕਰ ਲੈਂਦੇ ਆਪਾਂ ਠੀਕ ਹੈ ਵਧੀਆ ਨਾ ਇਹ ਕੋਈ ਉਹ ਕਲਪਣ ਕਿਹਦੇ ਆ ਸੱਜੇ ਫੇਰ ਜਾਪੂ ਅੱਗ ਦੀ ਗੱਲ ਹੈ ਹਾਂਾਰੇ ਵਧੀਆ ਅੱਗ ਦੀ ਗੱਲ ਨੂੰ ਹੋਇਆ ਮਧਰਾ ਨੂੰ ਰਹੀ ਹੈ ਅੱਗ ਤਾਂ ਪੈ ਰਹੀ ਹੈ ਉੱਤੇ ਗਾਲੇ ਉੱਤੇ ਦਰਾਨਾ ਹੋ ਗਿਆ ਨੂੰ ਦੂਜਿਆਂ ਨੂੰ ਉਹ ਵੀ ਅੱਗੇ ਬੈਠੀ ਹੈ ਉਹ ਦੂਜਿਆਂ ਨੂੰ ਜਿਹੜੇ ਮਨ ਖਾਣੂ ਗਏ ਉਹ ਵਿਚ ਉਹ ਦਿਖਾਏ ਨਾ ਨਾ ਕੋਈ ਅੱਗੇ ਖਾੜ ਕੋਈ ਕੁਝ ਕਰਦਾ ਕੋਈ ਦੇ ਜਿਹੜੇ ਕਲੰਡਰ ਜਿ ਬਣਾਏ ਹੋਏ ਜੇ ਉਹਨਾਂ ਨੂੰ ਬਿਟਾਇਆ ਉਹ ਜਿਹੜਾ ਦਰਰ ਮੈਂ ਉਹ ਚੱਕਿਆ ਜੀ ਉਹ ਲੈ ਜਾ ਕਬੀ ਜੇ ਆਇਆ ਤਾਂ ਆਇਆ ਖੁਦ ਆਪਣੇ ਕੋਹਾ जहाँ त्रिका मन तुझे अतख है तै नानक हर हर अमर तो बरदो जहाँ त्रिका मन तुझे हो जाता मनुष्य हां हो बैठो सच्ची जाग्यावे कोई बाहर चीज देख के आकर्षण पैदा हो जाता अच्छा फायदा होवे खेज हर बरते ते शांति शांत कर ਕਲੈ ਤੇਰੀ ਹੈ ਪਾਣੀ ਭਗਤ ਜਨਾ ਕੇ ਬਰਤਨ ਨਾਮ ਸੰਤ ਜਨਾ ਕੇ ਮਨ ਵਿਚਰਾਮ ਹਰਿ ਸੋਕਾ ਭਗਤ ਜਨਾ ਦਾ ਬਰਤਨ ਨਾਉਨਾ ਬਰਤਨ ਉਹਨਾਂ ਉਤਰੀਆਂ ਹਾਂੜੀਆਂ ਦਾ ਜਦ ਦੱਸ ਹੋਈ ਸੀ ਉਹਦਾ ਨਾਮ ਬਰਤਨ ਨੂੰ ਯਾਦ ਕਰੋ ਜਦੋਂ ਕੋਈ ਚੀਜ਼ ਉਤੇ ਕੋਈ ਆਪਾ ਹੁੰਦੇ ਜਦੋਂ ਮੱਛਾ ਦਾ ਮੱਛਾ ਤੇ ਆਪਾਂ ਲਾਤੀ ਇਹ ਛਿੜਕਦਾ ਕੋਈ ਸਪਰੇ ਕਰਦਾ ਕੋਈ ਉਹ ਇਤਰਾ ਕਰਤੀ ਸੀ ਉਤੇ ਬਚਨਾ ਕੀ ਸੀ ਇਸ ਖਲਾਫ ਹਰ ਕੰਮ ਹੁੰਦਲੇ ਆਹਾਂ ਉਪਰ ਕਿਹੜੀ ਜਿਹੜੀ ਚੀਜ਼ ਦਾ ਸਾਨੂੰ ਨੁਕਸਾਨ ਹੋਊਗਾ ਸਾਡੀ ਚੀਜ਼ ਦੇ ਵਿੱਚ ਆਹ ਜੀ ਕਿਹੜੀ ਕਿਹੜੀ ਚੀਜ਼ ਸਾਨੂੰ ਨੁਕਸਾਨ ਦੇ ਐ ਇਹ ਜਿੰਦਗੀ ਵਿੱਚ ਹੂੰ ਜਿੱਤੇ ਜਿਹੜਾ ਜਿਆਦਾ ਧਿਆਨ ਰੱਖੀਂ ਲੋੜ ਐ ਜਿਹੜੀ ਹੋਈ ਹੋਈ ਸਾਡੀ ਹੋਊਗੀ ਫੇਰ ਵੀ ਹੋ ਸਕਦੀ ਐ ਕਦੇ ਵੀ ਹੋ ਸਕਦੀ ਐ ਪਰ ਆਹ ਸਪਰੇ ਉਹ ਕਰਦੇ ਨੂੰ ਜ਼ਰਦੋਂ ਦਾ ਹੋ ਗਿਆ ਜਦਿਆਂ ਬਰਸਿਆ ਦੇ ਜਦੋਂ ਜਲ ਚੋਈ ਕਿ ਕਿਹੜੇ ਜੱਥੇ ਹੋ ਗਏ ਦਾ ਵਰਤਨ ਵਾਲੇ ਸੰਤ ਸ਼ਾਂਤ ਕਰਨ ਵਾਸਤੇ ਉਹ ਕੀ ਜਨਾ ਪੈਸਾ ਨਾ ਕੰਮ ਕਰਨ ਲੱਗ ਜਿਓ ਤੁਸੀਂ ਗਿਆਨੇ ਕੋਈ ਕਰ ਗਿਆਨਿਤ ਤੋਂ ਹੀ ਗੰਮਣਾ جے تسی اسیں شنو بھجاون واسطے کہیا وی جالو کوئی پائیا فلنہں پہ گاؤ دے ای ٹال دی کے اے پیسے دے توں کہ تو اپا کریے جگارد پھر توں ڈے نہ پئے کوئی اوتھے بند کرو او بند کرو کوئی جگارد ਜਿਹੜੀ ਤੇ ਦਾਈ ਤੇ ਵੀ ਉਹ ਰਹਿਣਾ ਬੀਤ ਪਾਸੇ ਕਰ ਬੱਦਲ ਸੀ ਜਿਹੜਾ ਤੇ ਫਟਾਪਾ ਮਾਰਦਾ ਜੀ ਸੁਣ ਕੇ ਨਹੀਂ ਆਪੇ ਬੋਲੂ ਸੁਣ ਕੇ ਨਹੀਂ ਮਾਰੀ ਮੋਟੇ ਉਹ ਵੀ ਜਿੱਤਾ